ਕ ਕ ਅੱਖਰ ਦੁਆਰਾ ਕਬੀਰ ਜੀ ਵਲੋ 7ਵੀਂ ਪੌੜੀ ਚ ਵਿਦੇਸ਼ ਹੈ ਜੀ ਕਾ ਕਿਰਨ ਕਮਲ ਮਹਿ ਪਾਵਾਂ ਸਸ ਵਿਗਾਸ ਸੰਪਟ ਨਹੀਂ ਆਵਾ ਕਾ ਕਿਰਨ ਕਮਲ ਮਹਿ ਪਾਵ ਜਦੋਂ ਗਿਆਨ ਦੀ ਕਿਰਨ ਹਿਰਦੇ ਕਮਲ ਚ ਪੈ ਜਾਂਦੀ ਹੈ ਚੇਨਨ ਕਰ ਦਿੰਦੀ ਹੈ ਮਨ ਆ ਬਿਦਾਰ ਖੁਸ਼ ਹੋ ਜਾਂਦਾ ਮਨ ਖੁੱਲ ਜਾਂਦਾ ਸੰਪਟ ਨਹੀਂ ਆਵਾ ਫਿਰ ਉਹ ਲਗਾਤਾਰ ਕਰਨ ਉੱਤੇ ਪੈਂਦੀ ਉਹ ਰਿਲਦੀ ਹੈ ਉਹ ਜਿਹੜਾ ਜਨਾ ਪਰਮ ਦਾ ਨਾਮ ਜਿਹਨਾਂ ਗਿਆਨ ਅੰਦਰ ਚਲੇ ਜਾਂਦਾ ਉਹ ਰੋਸ਼ਨੀ ਲਗਾਤਾਰ ਸੰਪਟ ਨਹੀਂ ਪੜਦਾ ਨਹੀਂ ਫਿਰ ਬਚਾ ਸਕਦਾ ਕੋਈ ਜਿੰਦੀ ਸਮਝ ਆ ਜਾਂਦੀ ਹੈ ਉਹ ਸਮਝ ਕੋਲੇ ਰਹਿੰਦੀ ਹੈ ਸਾਡੇ ਅੱਜ ਕੱਲ ਸਿੱਖਾ ਵਿੱਚ ਇੱਕ ਹੋਰ ਪਾਠ ਬੜਾ ਪ੍ਰਚਲਿਤ ਹੈ ਜੀ ਸੰਪਟ ਪਾਠ ਇਹ ਕੀ ਹੁੰਦਾ ਜੀ ਧਰਮ ਦਾ ਪੜਦਾ ਜਿਹੜਾ ਸੰਪਟ ਪਾਠ ਹੈ ਧਰਮ ਪੈਦਾ ਕਰਦੇ ਲੋਕਾਂ ਨੂੰ ਸੰਪਟ ਹੁੰਦਾ ਨਹੀਂ ਉਹ ਸੰਪਟ ਲੈਉਂਦੇ ਵਿਰੋਧੀ ਆ ਧਰਮੇ ਪੜਦੇ ਪੌੜਨੇ ਹਾਂਜੀ ਕੱਕਾ ਕਿਰਨ ਕਮਲ ਮਹਿ ਪਾਵਾਂ ਕਹਿੰਦਾ ਜੇ ਹਿਰਦੇ ਵਿੱਚ ਗਿਆਨ ਦੀ ਕਿਰਨ ਆ ਜਾਵੇ ਹਾਂ ਆਇਆ ਹੋਇਆ ਗਿਆਨ ਕਿਤੇ ਜਾਂਦਾ ਹੁੰਦਾ ਉਹ ਉਹ ਜਾਂਦਾ ਕਿਤੇ ਅੱਛਾ ਜੀ ਸਸਿ ਵਿਗਾਸ ਸੰਪਟ ਨਹੀਂ ਆਵਾ ਫੇਰ ਵਨ ਕੇ ਬਾਜ਼ਾਰ ਕੇ ਹੁੰਦਾ ਦੋ ਚੀ ਜਲੀ ਰੋਸ਼ਨੀ ਹੋ ਜਾਂਦੀ ਹੈ ਉਹ ਫਿਰ ਸਭ ਤੋਂ ਉਹ ਕੋਈ ਪੜਦਾ ਐਸਾ ਨਹੀਂ ਹੈਗਾ ਪਰ ਉਹਦਾ ਜਿਹੜਾ ਉਹਦਾ ਨਾਸ ਕਰ ਸਕਦੇ ਠੀਕ ਹੈ ਜੀ ਅਰ ਜੇ ਤਾਹਾਂ ਕੁਸਮ ਰਸ ਪਾਵਾ ਅਖੇ ਕਹਾ ਕਹਿ ਕਾ ਸਮਝਾਵਾ ਫੁੱਲ ਖਿੜ ਜਾਂਦਾ ਨਾ ਉਹਦੇ ਚ ਜਿਹੜਾ ਰਸ ਪੈਦਾ ਹੁੰਦਾ ਰਸ ਮਿਲਦਾ ਜੇ ਜਾਨ ਸਮਝ ਆਏ ਤੇ ਜੋ ਰਸ ਪ੍ਰਾਪਤ ਹੋਇਆ ਉਹ ਅਕਾਇ ਉਹਦੀ ਦੱਸਿਆ ਜਾ ਸਕਦਾ ਕਹਾ ਕੈ ਸਮਝਾਵਾਂ ਤੇ ਕੀ ਕਹੇ ਜੇ ਸਮਝਾਵਾਂ ਉਹ ਤਾਂ ਜਿਹਨੂੰ ਇੱਥੋਂ ਆ ਕੇ ਗੁਰਬਾਣੀ ਅਬੋਲ ਹੋ ਜਾਂਦੀ ਹੈ ਸੇਕੇ ਤੱਕ ਦਸ ਤੱਕ ਕੱਕਾ ਖੇਡਣੇ ਕਬਲ ਮੇ ਪਾਵਾ ਜੇ ਦੱਸ ਤਾਸੀਂ ਬਿਗਾਸ ਸੰ ਪਟ ਆਵਾ ਇਹ ਅੱਗੇ ਜਿਹੜਾ ਆਇਆ ਨਾਮਦਾ ਉਹ ਕਹੇ ਉਹ ਵੀ ਦੱਸਿਆ ਜਾ ਸਕਦਾ ਇੱਕ ਉਹ ਬੁਝਣ ਵਾਲੀ ਗੱਲ ਹੈ ਸਰ ਜਦੋਂ ਰਸ ਆਊਗਾ ਉਸੇ ਪਤਾ ਲੱਗੂਗਾ ਅੱਛਾ ਨਾ ਪ੍ਰਾਪਤ ਹੁੰਦਾ ਹੈ ਠੀਕ ਹੈ ਆ ਕਹਾ ਕਹਿ ਕਾ ਸਮਝਾਵਾਂ ਆ ਕਹੇ ਇਥੇ ਕੋਮਲ ਹੋਰ ਨੇ ਕਹਿਆ ਜੀ ਕਾਇ ਕਿ ਸਮਝਾਵਾਂ ਉਹ ਬੇੜ ਉਹ ਕਹ ਹੈ ਪਕਾਇ ਹੈ ਉਹ ਬੋਲੇ ਨਹੀਂ ਦੱਸਿਆ ਨਹੀਂ ਜਾ ਸਕਦਾ ਆਹ ਕਹੀ ਸਮਝਾਵਾਂ ਮੈਂ ਕਿਹ ਕ ਸਮਝਾਵਾਂ ਉਹ ਬੋਲਣ ਤੋਂ ਪਰੇ ਹੈ ਉਹ ਨਹੀਂ ਦੱਸਿਆ ਜਾ ਸਕਦਾ ਠੀਕ ਹੈ ਜੀ ਜਿਹੜੀ ਮਹੱਲਾ ਪਹਿਲਾ ਦੀ ਪੱਟੀ ਹੈ ਜੀ ਉਹਦੇ ਵਿੱਚ ਕਕੇ ਅੱਖਰ ਤੋਂ ਕੋਈ ਉਪਦੇਸ਼ ਨਹੀਂ ਹੈ ਮਹੱਲਾ ਤੀਜਾ ਇਹਦੇ ਵਿੱਚ ਕਕੇ ਤੋਂ ਉਪਦੇਸ਼ ਹੈ ਜੀ ਇਹ 8ਵੀਂ ਪੌੜੀ ਦਾ ਉਪਦੇਸ਼ ਹੈ ਜੀ ਕੱਕੇ ਕਾਮ ਕ੍ਰੋਧ ਪਰਮੇ ਹੋਏ ਮੂੜੇ ਮਮਤਾ ਲਾਗੇ ਤੁਦ ਹਰ ਵਿਸਰਿਆ ਹਾਂ ਜੋ ਕਹਿੰਦੇ ਕੱਕੇ ਨਾਲ ਕਹਿੰਦੇ ਨੇ ਵੀ ਕਾਮ ਕ੍ਰੋਧ ਜਿਹੜਾ ਹੈਗਾ ਉਹ ਤੈਨੂੰ ਲੱਗ ਗਿਆ ਕਾਮ ਕ੍ਰੋਧ ਦਾ ਪ੍ਰਭਾਵ ਪੈ ਗਿਆ ਤੇਰੇ ਤੇ ਇਸ ਕਰਕੇ ਤੈਨੂੰ ਬੂਰਖਾ ਜਿਹੜਾ ਹਰ ਸੀ ਉਹ ਵਿਸਰ ਗਿਆ ਨਾਮ ਵਿਸਰ ਗਿਆ ਤੈਨੂੰ ਤੈਨੂੰ ਜਿਹੜਾ ਅਸਲੀ ਕੰਮ ਕਰਨਾ ਆਇਆ ਉਹ ਵਿਸਰ ਗਿਆ ਤਾਂਬ ਇੱਛਾ ਲੱਗੀ ਤਦ ਜਿਨਾ ਲੱਗੀ ਆ ਫਿਰ ਸਰੀਰ ਕਰਕੇ ਸਰੀਰ ਦੀਆਂ ਲੋੜਾਂ ਦੇ ਇਹਨਾਂ ਦੀ ਚੜ੍ਹਦੀ ਰਲਦੀਏ ਕੋਈ ਚੋਰੀ ਆ ਮਨ ਤਾਂ ਚ ਪੈ ਗਿਆ ਘਰ ਵਿਸਰ ਤੈਨੂੰ ਠੀਕ ਹੈ ਜੀ ਪੜੇ ਗੁਣੇ ਤੂੰ ਬਹੁਤ ਪੁਕਾਰਾਂ ਵਿਣਬੂਜੇ ਤੂੰ ਢੂਬ ਮੁਵਾ ਗੱਲ ਬੁੱਝਣ ਵਾਲੀ ਗੱਲ ਦੇਖੋ ਇੱਥੇ ਵੀ ਉੱਥੇ ਬੁੱਝਣ ਵਾਲੀ ਗੱਲ ਛੱਡਤੀ ਸੀ ਪੜਦਾ ਸੁਣਦਾ ਬਹੁਤ ਛੋਲਾ ਬੜਾ ਕੋਨਾ ਪੜਨ ਬੜਾ ਰੌਲਾ ਪਾਉਣਾ ਸੀ ਬੜਾ ਸੁਣਨ ਬਹੁਤ ਪੁਕਾਰਨ ਰੌਲਾ ਬੜਾ ਪੋਨਾ ਬੁਝਿਆ ਕੋਸ਼ੀਂਦੀ ਬੜੇ ਬੁਝੇ ਉਹ ਡੁੱਬੂਗਾ ਬਜੇ ਨਾ ਬੁਝਿਆ ਨਹੀਂ ਕੋਸ਼ੋ ਡੁਬਕੇ ਭਰਿਆ ਉਹ ਵਿਦਵਾਨ ਹੁੰਦਾ ਡੁਬਕੇ ਮਾਲ ਨਾਲੀ ਉਹ ਗੱਲ ਹੈ ਵਿਦਿਆ ਵਿਦਿਆ ਦਾ ਸਮੁੰਦਰ ਡੁੱਬ ਜਾਂਦਾ ਉਹ ਪਰ ਪਸੰਗਰ ਜੀ ਡੁੱਬਿਆ ਹੀ ਰਹਿੰਦਾ ਠੀਕ ਹੈ ਜੀ ਗੌੜੀ 52 ਅਖਰੀ ਮਹੱਲਾ ਪੰਜਵਾਂ ਗੌੜੀ 17ਵੀਂ ਚ ਉਪਦੇਸ਼ ਹੈ ਜੀ ਕੱਕੇ ਅੱਖਰ ਦਾ ਪਵੜੀ ਕੱਕਾ ਕਾਰਨ ਕਰਤਾ ਸੂ ਲਿਖਿਓ ਲੇਖ ਨ ਮੇਟਤ ਕੋ ਕਕਾ ਕਾਰਨ ਸ੍ਰਿਸ਼ਟੀ ਦਾ ਕਰਤਾ ਸਉ ਜਿਹੜਾ ਕਰਤਾ ਹੈ ਖੁਦੀ ਕਾਰਨ ਸ੍ਰਿਸ਼ਟੀ ਦਾ ਉਹਦਾ ਲੇਖ ਜਿਹੜਾ ਲਿਖਿਆ ਉਹ ਜੋ ਬੰਦ ਲਿਆ ਜੋ ਲਿਖਿਆ ਉਹ ਕੋਈ ਨਹੀਂ ਮੇਟ ਸਕਦਾ ਲੇਖ ਨ ਮੇਟ ਕੋ ਜੋ ਅੰਦਰ ਕਰਤਾ ਬੈਠਾ ਹੈ ਜੋ ਮੰਨ ਲੈਂਦਾ ਉਹੀ ਕਰਦਾ ਕੋਈ ਉੱਥੇ ਆ ਸਿੱਧੇ ਰਸਤੇ ਕਿਤੇ ਵੀ ਨਹੀਂ ਉਹਨੂੰ ਕੋਈ ਪਾ ਸਕਦਾ ਦੱਸ ਸਕਦਾ ਉਹਨੂੰ ਰਾਹ ਦੇ ਸਕਦਾ ਮੰਨੇ ਨਾ ਮੰਨੇ ਉਹਦੀ ਮਰਜ਼ੀ ਹੈ ਚ ਕੋਈ ਕਵੀ ਪਈ ਤਾਂ ਸ੍ਰਿਸ਼ਟੀ ਰਚੀ ਗਈ ਇਹਨਾਂ ਦਾ ਮਤਲਬ ਇਹ ਹੈ ਸ੍ਰਿਸ਼ਟੀ ਪਈ ਆ ਹੰਥ ਵਿੱਚ ਉਹ ਤਾਂ ਸ੍ਰਿਸ਼ਟੀ ਰਚਣੀ ਪਈ ਕਾਰਨ ਉਹ ਹੈ ਕਿ ਕਰਤਾ ਵੀ ਹੈ ਕਾਰਨ ਵੀ ਇਹੀ ਹੈ ਜੋ ਇਹ ਮੰਨ ਲੈਂਦਾ ਜੋ ਇਹ ਮੰਨ ਲਿਆ ਜੋ ਇਹ ਲਿਖ ਲਿਆ ਆਪਣੇ ਅੰਦਰ ਉਹੀ ਕਰਦਾ ਇਹਦਾ ਲਿਖਿਆ ਕੋਈ ਬਟਾ ਨਹੀਂ ਸਕਦਾ ਇਹ ਆਪਣਾ ਨੇ ਜੇ ਆਪੇ ਪਟੋਦਾ ਆਪਣੀ ਬਨੌਤ ਨੂੰ ਆਪੇ त्यागਦਾ ਹੈ ਹੋਜੀ ਨਹੀਂ ਹੋ ਤਕਛੂ ਦਉ ਬਾਰਾ ਕਰਨੇ ਹੋ ਗਿਆ ਇਹ ਤੇ ਇੱਕ ਵਾਰ ਹੋ ਗਿਆ ਦੋਈ ਵਾਰ ਉਹਦੇ ਤੇ ਕੁਝ ਲਿਖਿਆ ਨਹੀਂ ਜਾ ਸਕਦਾ ਇੱਕ ਵਾਰ ਲਿਖਿਆ ਗਿਆ ਲਿਖਿਆ ਗਿਆ ਉਹਦੇ ਉੱਤੇ ਵੀ ਨਹੀਂ ਕੋਈ ਲਿਖਿਆ ਜਾ ਸਕਦਾ ਜੋ ਕਰਨੀ ਹਾਰ ਭੁਲਣਾ ਹਾਰਾ ਹੈ ਦੀ ਇਹਨੇ ਆਪੇ ਲਿਖਿਆ ਭੁਲਦਾ ਤਾਂ ਹੈ ਦੀ ਇਹ ਮੇਰਾ ਕੀ ਲਿਖਿਆ ਜਿਹੜਾ ਕੁਝ ਬੰਦੇ ਹੁੰਦਾ ਉਹ ਭੁਲਾਉਣਾ ਪੈਂਦਾ ਜੇ ਉਹ ਤੇਰਾ ਪੈ ਗਏ ਗੁਰਮਤ ਤੋਂ ਉਲਟੇ ਰਾਹ ਪਿਆ ਹੋਇਆ ਹੈ ਆਪਣਾ ਰਾਹ ਯਾਦ ਹੈ ਗੁਰਬਲ ਦੇ ਰਸਤੇ ਤਾਂ ਨਹੀਂ ਹੁੰਦਾ ਆਪਣੇ ਨੂੰ ਨਹੀਂ ਭੁਲਦਾ ਹਾਂ ਜੇ ਭੁਲਾਉਣਾ ਚਾਹੇ ਫੇਰ ਉਹਨੂੰ ਦੇ ਜਿ ਛੱਡਣਾ ਚਾਹੇ ਛੱਡ ਦਿੰਦਾ ਮਾਇਆ ਸਾਨੂੰ ਭੁੱਲਦੀ ਦੀ ਪਰ ਜੇ ਭੁੱਲਣਾ ਚਾਹੀਏ ਭੁੱਲ ਸਕਦੇ ਹਾਂ ਠੀਕ ਹੈ ਇਹਦਾ ਕੀ ਭਾਵ ਹੈ ਨਹੀਂ ਹੋਤ ਕਛੂ ਦਊ ਬਾਰਾ ਉਹ ਲਿਖ ਲਿਆ ਨਾ ਉਹਦੇ ਉੱਤੇ ਦੀ ਦੂਆ ਦੀ ਹੋ ਸਕਦਾ ਜਿੱਨਾ ਚ ਰੋ ਲਿਖਿਆ ਹੋਇਆ ਉਹ ਵਿਰੋਧ ਜ ਨਹੀਂ ਉਹ ਕੁਝ ਕਰਦਾ ਅੱਛਾ ਫੇਰ ਸਦਾ ਹਰਕੇ ਹੋਊਗਾ ਫੇਰ ਆਰ ਪਹਿਲਾਂ ਮਟੋਲਾ ਲਗਾਊਗਾ ਉਹਨੇ ਕਿਹਾ ਕਿ ਅਗਰਾਂ ਬਹੁਤ ਗੱਲੇ ਕਿਹਾ ਹੈ ਛੱਡਣਾ ਪਊਗਾ ਲੈ ਕਿਹਾ ਹੈ ਦੁਬਾਰਾ ਲਿਖਣਾ ਪਊਗਾ ਦੇਖੋ ਨਾ ਮਾਇਆ ਦੀ ਭੁੱਖ ਹੈ ਪਹਿਲਾਂ ਸਬਰੂ ਮਾਇਆ ਦੀ ਭੁੱਖ ਬੇਸ਼ੈ ਆ ਰਹਿਦੀ ਹੈ ਰੂ ਤੇ ਸਦਾ ਹੀ ਲੱਗੀ ਰਹਿੰਦੀ ਹੈ ਤੇ ਛੱਡਣੀ ਪਊਗੀ ਜਾਂ ਇਹਨੂੰ ਬਚਾਉਣੀ ਪਊਗੀ ਗਿਆਨ ਨਾਲ ਨਾਮ ਦੀ ਭੁੱਖ ਜਾਗੂਗੀ ਫਿਰ ਨਾਮ ਦੇ ਵਿੱਚ ਲੱਗਿਆ ਲੱਜੂਗਾ ਇਹਨੂੰ ਆਪੇ ਛੱਡਣੀ ਪਊਗੀ ਛੱਡਣੀ ਕਿਵੇਂ ਹੈ ਛੱਡਣੀ ਕਿਉਂ ਹੈ ਇਹ ਗੱਲ ਸਭ ਦਾ ਵਿੱਚ ਹੈ ਯੂ ਨੂੰ ਛੱਡਣੀ ਹੈ ਕਿਵੇਂ ਛੱਡਣੀ ਹੈ ਇਹ ਤਾਂ ਸਮਝਣ ਦਾ ਵਿੱਚ ਹੈ ਜੇ ਸਮਝ ਕੇ ਛੱਡਣੀ ਚਾਹੂ ਛੱਡ ਲੂ ਕੇ ਵੀ ਛੱਡਣੀ ਚਾਹੇ ਫਿਰ ਵੀ ਨਹੀਂ ਛੱਡਦਾ ਅੱਛਾ ਜੀ ਕਹਿੰਦਾ ਪਾਪ ਕੀ ਚੀਜ਼ ਲਿਖੀ ਹੈ ਉਹਦੇ ਉੱਪਰ ਦੁਬਾਰਾ ਗਿਆਨ ਨਹੀਂ ਚੜ ਸਕਦਾ ਪਹਿਲਾਂ ਉਹ ਮਨੋਤ ਛੱਡਣੀ ਪਊਗਾ ਹਾਂ ਪੱਥਰ ਤੇ ਲਿਖਿਆ ਹੋਇਆ ਨਾ ਮੋਟ ਪੱਥਰ ਹੈ ਉਹਦੇ ਉੱਤੇ ਲਿਖਾਈ ਲਿਖ ਕੇ ਬੈਠ ਗਿਆ ਪੱਥਰ ਦਾ ਲਿਖਿਆ ਤਾਂ ਉਹਨਾਂ ਪੱਥਰ ਘਸੇ ਉਹ ਮਾਇਲ ਰਹੇ ਉਹ ਉਤਲੀ ਤਾਂ ਫਿਰ ਥੱਲੇ ਜਾ ਕੇ ਲਿਖੇ ਠੀਕ ਹੈ ਜੀ ਕਾਹੂ ਪੰਥ ਦਿਖਾਰੈ ਆਪੈ ਕਾਹੂ ਉਦਿਆਨ ਪਰਮਤ ਪਛਤਾਪੈ ਤੇਰੇ ਬੇੜੇ ਦਾ ਇਹ ਆਪਣੇ ਮਨ ਬੁੱਧੀ ਨੂੰ ਪੰਥ ਦਿਖਾ ਦਿੰਦਾ ਪਹਿਲਾਂ ਆਪ ਸਮਝ ਲੈਂਦਾ ਉਹਨੂੰ ਸੁਝਾ ਦਿੰਦਾ ਆਪੇ ਹੀ ਦਿਖੂਦਾ ਪੰਥ ਜੇ ਨਾ ਦਿਖਾਣਾ ਹੋਵੇ ਪੰਥ ਸਮਝ ਲਵੇ ਆਪ ਮਨ ਨੂੰ ਨਮ ਲਾਉਣ ਹੋਵੇ ਫੇਰ ਉਹ ਭਰਮ ਦੇ ਵਿੱਚ ਫਸਾ ਕੇ ਰੱਖਦਾ ਫਿਰ ਉਹ ਜਰਾ ਜਲਦਾ ਰਹਿੰਦਾ ਕਿ ਨਾਮ ਸਤਗੁਰ ਤੋਂ ਹੀ ਪਾਇਆ ਜਾਣਾ ਜਾਂ ਸਤਗੁਰ ਤੋਂ ਹੀ ਪਾਇਆ ਜਾਣਾ ਜੇ ਸਤਗੁਰ ਨੇ ਮੰਨ ਕੇ ਆਪ ਗਾ ਨਹੀਂ ਉਹਨਾਂ ਨੂੰ ਕਿਹਾ ਵੀ ਫੇਰ ਬੁੱਧੀ ਨਹੀਂ ਹੋ ਇਹਦੇ ਕਹੇ ਤੇ ਜਾਂਦੀ ਹੈ ਕਿ ਨਾਮੋਂ ਭੁੱਲੀ ਨਾ ਹੋ ਚੁੱਕੀ ਜਿੱਤਾਂ ਲਾਈ ਤੇ ਤਹੀ ਲੱਗੀ ਬੁੱਧੀ ਇਹੀ ਕਹਿੰਦੀ ਹੈ ਜੇ ਤੈਂ ਲਾਈ ਸੀ ਤੈਂ ਸੁਣ ਲਿਆ ਸੀ ਤੈਂ ਕਿਹਾ ਨਹੀਂ ਮੈਨੂੰ ਵੀ ਆਪਾਂ ਇੱਧਰ ਲੱਗਣ ਤਾਂ ਤੈਨੂੰ ਜਿੱਤਾਂ ਲਾਈ ਸੀ ਮੈਂ ਲੱਗੀ ਹੋਈ ਸੀ ਜੇ ਕੋਈ ਪੰਥ ਦਿਖਾਣ ਲਿਆ ਤਾਂ ਦਿਖਾਣ ਲਵੇ ਨਹੀਂ ਆਏ ਰਸਤੇ ਜਾਣਾ। ਜੇ ਸਬ지 ਕੇ ਨਹੀਂ ਮੰਨਣਾ ਇਹਨੇ ਫਿਰ ਉਹ ਵੀ ਨੂੰ ਢੋਲਣਾ। ਫੈਸਲਾ ਕਰ ਵੀ ਨਾ ਉਧਰ ਨੂੰ ਜਾਣਾ ਜਾਣਾ। ਠੀਕ ਹੈ ਜੀ। ਕਾਹੂ ਪੰਥ ਦਿਖਾਰੇ ਆਪੇ ਆਪੇ ਚਿੱਤ ਨੂੰ ਜੀ। ਆਹ ਆਪੇ ਚਿੱਤ ਇਹਦੇ ਵਿੱਚ ਕੇਵਲ ਚੱਲਦੀ ਦੋਹਾਂ ਦੇ ਵਿੱਚ। ਆਹ ਰੇਗਾ ਹੀ ਚੱਲਦਾ ਆਜਾ ਜਦ ਗਿਆਨ ਦੇ ਵਿੱਚ ਪਰਫਦਾ ਰਹਿੰਦਾ ਫਿਰ ਬਾਅਦ ਚ ਪਛਤਾਉਂਦਾ ਮੇਰੀ ਲੱਵੀ ਗਲਤੀ ਕਰ ਲਈ ਉਹ ਕੰਮ ਆਪਾਂ ਨੇ ਐਡਾ ਕਰ ਲੈਣਾ ਠੀਕ ਆ ਪਰ ਆਪਾਂ ਬਸ ਚਾਹਤਾ ਵੀ ਚਲ ਕੀ ਕਰਨਾ ਫਿਰ ਪਛਤਾਉਂਦਾ ਸਰਬ ਕਰਕੇ ਜੇ ਨਹੀਂ ਮੰਨਦਾ ਸੱਚ ਨੂੰ ਮਾਰਗ ਤੇ ਸੱਜੇ ਨੂੰ ਨਹੀਂ ਚੱਲਦਾ ਫਿਰ ਪਛਤਾਉਂਦਾ ਬਾਅਦ ਠੀਕ ਹੈ ਆਪਨ ਖੇਲ ਆਪ ਹੀ ਜੋ ਜੋ ਸੋ ਨਾਨਕ ਲੀਨੋ ਇਹ ਆਪਣਾ ਖੇਲ ਆਪੇ ਕਰਦਾ ਰਹਿੰਦਾ ਹੈ ਤੂੰ ਦੇਖੋ ਜੇ ਪਰਮੇਸ਼ਰ ਨੂੰ ਕਹਾਂਗੇ ਉਹ ਤਾਂ ਮਾਇਆ ਚੋਂਦਾ ਹੀ ਨਹੀਂ ਉਹ ਤਾਂ ਇਹਨੂੰ ਦੱਸਦਾ ਰਹਿੰਦਾ ਆਹ ਕਰਦਾ ਰਹਿੰਦਾ ਜੀ ਨਾ ਕਰ ਇਹਨਾਂ ਨੂੰ ਰਹਿੰਦਾ ਕਰਦਾ ਰਹਿੰਦਾ ਆਪ ਦੂਰੇ ਰਹਿੰਦਾ ਹਜ਼ਰਤ ਖੇਲ ਆਪ ਜੋ ਦਿਨੋ ਸੋ ਨਾਨਕ ਲਈਨੋ ਨਾਨਕ ਦਾ ਜੋ ਦਿੱਤਾ ਹੈ ਨਾਨਕ ਨੇ ਤਾਂ ਲੈ ਲਿਆ ਪਰ ਇਹ ਲੈਂਦਾ ਲੈਂਦਾ ਇਹਦੀ ਮਰਜ਼ੀ ਹੈ ਜੋ ਅੰਦਰ ਆਤਮ ਦੀ ਆਵਾਜ਼ ਤੋਂ ਮਿਲਦਾ ਹੈ ਉਹ ਲੈਣਾ ਚਾਹੀਦਾ ਹੈ ਉਹਨੂੰ ਮੰਨ ਲੈਣਾ ਚਾਹੀਦਾ ਠੀਕ ਹੈ ਜੀ ਤੇ ਜੇ ਆਪਾਂ ਦੇਖੀਏ ਕਬੀਰ ਸਾਹਿਬ ਨੇ ਤਾਂ ਜਿਹੜਾ ਕਕੇ ਦਾ ਉਪਦੇਸ਼ ਦਿੱਤਾ ਸੀ ਉਹ ਸੀਗਾ ਵੀ ਜੇ ਗਿਆਨ ਦੀ ਕਿਰਨ ਮਨ 'ਚ ਪੈ ਜਵੇ ਤਾਂ ਵਿਕਾਸ ਪੈਦਾ ਹੁੰਦਾ ਹੈ ਤੇ ਤੀਸਰੇ ਪਾਸ਼ਾ ਨੇ ਕਿਹਾ ਸੀ ਕਿ ਜਿਹੜਾ ਕਾਮ ਕ੍ਰੋਧ ਲੋਭ ਹੰਕਾਰ 'ਚ ਉਲਝਿਆ ਹੋਇਆ ਹੈ ਤਾਂ ਪੜ੍ਹ ਕੇ ਗੁਣ ਕੇ ਬਸ ਬੇਕਾਰੇ ਹੋ ਰਿਹਾ ਡੁੱਬਿਆ ਹੈ ਉਹ ਕਰਨ ਪਈ ਤੇ ਬਾਸਬਲੀ ਮੰਨਦਾ ਦਫਾ ਹੋਣਾ ਉਹ ਅੱਛਾ ਜੀ ਉਹ ਆਪਣੇ ਆਪ ਫੜਦਾ ਨਹੀਂ ਆਉਂਦਾ ਫੜਦਾ ਖਤਾਨ ਲੈਂਦਾ ਉਹ ਆਪਣੇ ਆਪ ਨਹੀਂ ਹੁੰਦਾ ਜਦ ਮੈਂ ਨਾ ਮੰਨੂ ਕਹਿ ਦਿੰਦਾ ਫਿਰ ਫੜਦਾ ਆ ਗਿਆ ਆਪਣੇ ਆਪ ਨਹੀਂ ਫੜਦਾ ਹੁੰਦਾ ਠੀਕ ਹੈ ਜੀ ਤੇ ਪੰਜਵੇਂ ਦੱਸਿਆ ਵੀ ਇਹਦੇ ਆਪਣੇ ਬਾਸ ਹੈ ਵੀ ਇਹਨੇ ਇਹਨੇ ਪੰਥ ਤੇ ਚੱਲ ਨਹੀਂ ਚੱਲਦਾ ਕੋਈ ਨੇ ਹਾਂ ਜੀ ਕੇ ਪਛਤਾਉਣਾ ਸਮਝ ਕੇ ਕਰਨ ਪਈ ਤੇ ਬਾਅਦ ਵੀ ਇਹਨੇ ਕੀ ਕਰਨਾ ਪੜਦਾ ਲਾਉਣਾ ਆ ਕਿੰਨੋਂ ਦੇਣਾ ਕੰਪਟਰ ਪਾਉਣਾ ਆ ਜਾਂ ਕੰਪਟਰ ਨਹੀਂ ਪਾਉਣਾ ਇਹਦੇ ਆਪਣੀ ਮਰਜ਼ੀ ਤੇ ਖੜੀ ਹੈ ਗੱਲ ਉਹਨਾਂ ਨੇ ਹੋਰ ਐਡਾ ਖੋਲਤੀ ਇੱਥੇ ਕੱਕੇ ਅੱਖਰ ਦਾ ਉਪਦੇਸ਼ ਦੀ ਸਮਾਪਤੀ ਹੈ ਜੀ ਬੱਸ